ਜਬ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਦ ਆਪਣੀ ਸੋਭਾ ਆਪਨ ਸੰਗ ਬਣਾਈ ਚਲੋ ਆਨੇ ਆਪਣੀ ਸੋਭਾ ਨੂੰ ਆਪਣੇ ਨਾਲੇ ਰੱਖਿਆ ਸੋਭਾ ਕੋ ਫੇਰੀ ਹੈ ਆਪਣੇ ਨਾਲ ਜਿਹੜਾ ਜੁੜਿਆ ਰਹਿਣਾ ਆਪਣੇ ਮੂਲ ਨਾਲ ਜੁੜਿਆ ਰਹਿਣਾ ਈ ਮੇਰੀ ਸੋਭਾ ਬਸ ਇਹ ਹੀ ਸੋਭਾ ਮੰਨ ਲਈ ਵੀ ਆਪਣੇ ਮੋਢਾਂ ਨਾਲ ਜੁੜਿਆ ਰਹਿਣ ਤੇ ਸੋਭੇ ਵੀ। ਇਹ ਮੰਨ। ਕਿ ਇਹ ਮੰਨ ਲਿਆ ਵੀ ਦੁਨੀਆਂ ਦੇ ਵਿੱਚ ਕਿੰਨੇ ਲੋਕ ਮੇਰੇ ਬਗਲ ਨੇ ਮੈਂ ਕਿਹਨਾ ਨਾਲ ਜੁੜੇ ਹੋਣਾ ਕਿੰਨੇ ਮੈਨੂੰ ਸਵਾਪਾ ਕਰਦੇ ਤੇ ਸੋਭਾ ਦਈਓ। ਤੇ ਕਦੇ ਤਾਂ ਇਹ ਸੋਭਾ ਬਣਾਈ ਜਾ ਸੁਪਰ ਪਾਵਰ ਦੀ। ਆਈ ਆਈ। ਦੁਨੀਆਂ ਦੇ ਮਨੁੱਖਾਂਾਂ ਬਾਂ ਕਹਿੰਦੀਆਂ ਹੁੰਦੀਆਂ ਨੇ। ਇਕਦੋ ਬਾਹਰ ਮਾ ਦੁਨੀਆ ਤੋਂ ਕੁਝ ਨਹੀਂ ਲੈਣਾ ਮੈਂ ਤਾਂ ਆਪਣੇ ਨਾਲ ਜੁੜਿਆ ਰਹਿਣਾ ਹੀ ਜ਼ੋਬਾ ਆਪਣੇ ਨਾਲ ਜੁੜੇ ਹੋਏ ਦੀ ਜ਼ੋਬਾ ਸੱਚਖੰਡ ਵਿੱਚ ਆ ਸੱਚੀ ਜ਼ੋਬਾ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਆਪਣੇ ਆਪ ਨਾਲ ਜੁੜਿਆ ਹੋਇਆ ਬਾਹਰਲੀ ਜ਼ੋਬਾ ਦੀ ਇੱਛਾ ਨਹੀਂ ਕਰਦਾ ਸੰਸਾਰ ਦੀ ਜ਼ੋਬਾ ਦੀ ਇੱਛਾ ਨਹੀਂ ਜੀ ਦੇ ਵਿੱਚ ਇਹਨਾਂ ਦੁਨੀਆ ਦੀਆਂ ਬੜਾਈਆਂ ਨੂੰ ਅੱਗ ਨਾਲ ਜਾਲ ਦੱਤਾ ਵੀ ਸੇ ਦੀ ਜਾਲ ਕਰ ਦਿੱਤਾ ਉਹਨੇ ਆਪਣੀ ਜ਼ੋਬਾ ਆਪਣ ਸੰਗ ਬੜਾਈ ਇਹ ਜਿਹੜੀ ਜ਼ੋਬਾ ਇਹ ਤਾਂ ਹੈ ਸਰਗਾਚ ਮੁਕ ਜੂਗੀ ਪਰ ਮੇਸ਼ਾ ਦੇ ਕਾਰੇ ਜ਼ੋਬਾ ਬਜ਼ੂਰ ਹੈ ਵੇ ਤੋੜ ਹੀ ਕਾ ਨਹੀਂ ਇਹ ਜਿਹੋ ਜ਼ੋਬਾ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਜਿਹੜੀ ਆ ਦੁਨੀਆ ਦੀ ਜ਼ੋਬਾ ਹੈ ਵਾਲੀ ਇਨਾਵਤ ਨਰਕ ਤਿਆਰ ਹੈ ਇਨਾਵਤ ਨਰਕ ਦਬੋ ਰਾਜ ਦਰਾਜਾ ਨਰਕ ਰਾਜ ਵੀ ਬੜਾ ਖਾਬੜਿਆ ਇਹਨਾਂ ਦੀ ਇੱਛਾ ਸੀ ਪਰ ਨਰਕ ਵੀ ਤਿਆਰ ਹੈ ਨਾਲ ਉਹਦਾ ਨਹੀਂ ਕੋਈ ਸੀਟ ਜੋ ਡੈਮੋਕਰਟ ਪੰਡਿਤ ਹੋਣੀ ਇੱਕ ਬੜੀ ਸਪੈਸ਼ਲ ਉਤੇ ਕੋਈ ਲੋੜ ਨਹੀਂ ਉਹ ਜਿੱਤ ਉਹ ਥੋੜਾ ਵਾਦੇ ਰਿਆ ਰਵੇ। ਫਾਦੂ ਸੇਟਾ ਨਹੀਂ ਹੁੰਦਾ। ਫਾਦੂ ਗੱਡੀ ਨਾ ਬੀ। ਨਾਲ ਉਹ ਗੱਡੀ ਦੀ ਲੋੜ ਨਹੀਂ ਜਾ ਕੇ ਛੱਡੇ ਦੇਣਾ। ਛੱਡੇ ਰਲਾ ਕੇ ਚਲੇ ਜਾਂਦਾ। ਅਕਾਸ਼ ਚੋਂ ਥੱਲੇ ਫਿਰਨਾ ਹੋਵੇ। ਉਹ ਤੇ ਕੀ ਲੋੜ ਹੈ। ਅਪਣਾ ਥੰਮ ਬਣਾਈ। ਸਭ ਤਬਰ ਮਾਏ ਬਾਪ ਮਿੱਤਰ ਸੁਤ ਭਾਈ। ਨਾ ਤੇ ਮਾਏ ਮਾਏ ਨਾ ਤੇ ਬਾਪ ਨਾ ਮਿੱਤਰ ਨਾ ਕੋਈ ਸੁਤ ਹੈ। ਨਾ ਕੋਈ ਭਾਈ ਹੈ। ਆ ਜਿਹੜੇ ਮਿੱਤਰ ਸੁਤ ਭਾਈ ਐ ਮਾਂ ਬਾਪ ਐ ਇਹਦੇ ਨਾਲੇ ਜੁੜਿਆ ਹੋਇਆ ਨਾ ਸਾਦੇ ਕਰਕੇ ਜਸਰੀਰ ਕਰਕੇ ਮਾਇਆ ਕਰਕੇ ਇਹ ਮਾਇਆ ਦੇ ਬੰਧਨ ਨੇ ਸਾਰੇ ਜਦੋਂ ਆਪਣੇ ਮੋੜ ਨਾਲ ਜੁੜ ਗਿਆ ਮਾਇਆ ਛੁੱਟ ਗਈ ਫਿਰ ਉੱਤੇ ਮਾਸਪਤਾ ਸੁਤ ਬੰਧੋ ਭਾਈ ਸਭ ਛੁੱਟ ਗਏ ਐ ਸੱਚ ਮੁਕਤੀ ਆ ਤੇ ਐ ਮੁਕਤੀ ਹੋ ਗਣੀ ਐ ਆਇ ਮੁਕਤੀ ਆ ਮੁਕਤੀ ਨਹੀਂ ਰਹੋੜੀ ਸੋਤੇ ਮਾਜ ਬਦਖਾਨਾ ਦਾ ਘਰ ਹੈ ਜਿਸੋਤਖਾਨਾ ਦਾ ਭਾਈ ਹੁੰਦਾ ਸੀ ਜੇਆ ਬੋਲਵਾ ਬਈ ਬਾਇ ਨੇ ਉਹਦਾ ਬੁੱਢਾ ਬਹਿ 6 ਕਾਰਾਂ ਆਈਆਂ 100 ਕਾਰ ਗਈ ਸੀ ਜਾਂ 200 500 ਕਾਰ ਗਈ ਸੀ ਉਹਨਾਂ ਨੇ ਕੁੜੀ ਵਿਆਹੀਆ ਕੱਲੇ ਕੱਲੇ ਬਰਾਤੀ ਨੂੰ ਕਾਰ ਦਿੱਤੀ ਤੇ ਇਹ ਸੋਪੇ ਚ ਪੈ ਗਿਆ ਇਹ ਵੀ ਤੇ ਸੋਪੇ ਤਪੇ ਡਿੰਜਾ ਚ ਟਾ ਗਿਆ ਫੇਰ ਕਿ ਵੀ ਝੋਬਾਇਆ ਇਹ ਝੋਬਾ ਦਾ ਨਿਸ਼ਾਨ ਸੰਧਾਰੀ ਆ ਜਿਹੜੇ ਦੀ ਜੁਰੀ ਦੁਨੀਆਂ ਕੀ ਵੜਾਈ ਆ ਵੱਡੀਆਂ ਕਾਰਾਂ ਦੇ ਤੇ ਕੱਲੇ ਕੱਲੇ ਬਰਾਦਰ ਨੂੰ ਗੜ ਕੇ ਦੇ ਗਿਦਾ ਵੜਿਆ ਉਹ ਸਾਲ ਕੌਣ ਦੋ ਮੈਨਾਂ ਕਿਥੋਂ ਆਇਆ ਸੀ ਜੇ ਵੀ ਕਥਾ ਕੀਤਾ ਸੀ ਝੋਬਾ ਬਾਸ ਤੇ ਪਾਪ ਕਨਾ ਕੀਤਾ ਸੀ ਝੋਬਾ ਦਾ ਚਲੋ ਝੋਬਾ ਹੀ ਆ ਜਾਈਏ ਦਰਗਾਹ ਤਾਉ ਝੋਬਾ ਦੀ ਗਾਮਿਆਬ ਦਾ ਪਰਮਾਨਿ ਸੋ ਪਾ ਦੋ ਦੇ ਵਾਸਤੇ ਬਹੁਤ ਪਾਪ ਕਰਨਾ ਪਿਆ ਜਦੋਂ ਨਾਲ ਡਰਦਾ ਜਿਸਨੂੰ ਬਰਾਦੋ ਦੀ ਐਸੋ ਅੰਬਰ ਸਰੋਂ ਗੱਜ ਆ ਜੋ ਚੱਲੇ ਨਹੀਂ ਉਧਰ ਪਹੁੰਚ ਗਈ 82 ਦੋਨੇ ਹੱਲ ਸੰਦੇ ਬਰਾਦ ਇਹਦਾ ਠੀਕ ਹੈ ਇਹਦਾ ਬੜਾ ਨਹੀਂ ਸੀ ਪਰ ਜਿਸਨੂੰ ਉਹਨੂੰ ਜਾਣਦਾ ਵੀ ਹੈ ਉਹ ਸਾਬਿਆ ਕਿੱਥੇ ਗਿਆ ਕਿੱਥੇ ਗਿਆ ਹੋਊਗਾ ਉਹ ਦੋ ਦਿਨ ਦੀ ਸੋਪਾ ਸੀ ਕੋਈੰ ਦਿਨਾਂ ਦੀ ਜਿਹਨੂੰ ਅਕਾਲੀ ਫੁੱਲਾਸਾ ਨਾ ਜਾਵੇ ਇੱਥੇ ਨੰਗਾ ਪਿੰਡਾ ਕਰਕੇ ਨੂੰ ਬੰਦ ਲੋ ਇੱਥੇ ਉਹ ਦੋ ਸੋਪਾ ਕਿੱਥੇ ਗਈ ਸੀ ਉਹ ਕਿੱਥੇ ਗਈ ਸੀ ਉਹ ਵੀ ਦੇ ਆਇਆ ਨੌਦੌਦੂ ਰੂਗੇ ਫੇੜਾ ਉੱਥੇ ਖੜਨਾ ਪਿਆ ਕੋੜ ਦੇ ਬਾਣ ਨੂੰ ਜੇ ਸਰਬ ਕਲਾ ਆਪੇ ਪਰਵੀਨ ਤੈ ਬੇਦਕ ਦੇਵ ਕਹਾਂ ਕਉ ਚੀਨ ਕਿਆ ਸਰਬ ਕਹਾਂ ਕਉ ਚੀਨ ਤੈ ਆਪੇ ਪਰਪੀਨ ਪਰਵੀਨ ਤਾ ਬੇਦ ਦੀ ਕੀ ਲੋੜ ਪਈ ਖੋਜਣ ਦੀ ਯਾ ਲੋੜ ਜਿਆਦਾ ਹੈ ਜੀ ਆਪ ਸਰਵ ਪ੍ਰਵੀਨ ਨਾ ਹੋਵੇ ਸਰਵ ਕਲਾ ਦਾ ਬੇ ਪ੍ਰਵੀਨ ਕੋਈ ਐਸੀ ਕਲਾ ਹੀ ਨਹੀਂ ਹੈ ਕੋਈ ਐਸੀ ਜਿਹੜੀ ਇਹਨੂੰ ਨਾ ਆਉਂਦੀ ਹੋਵੇ ਉਹ ਬੇਚਦਾ ਸਾਰੀਆਂ ਕਲਾ ਹੈ ਜੀ ਬੇਦਕਦੇ ਬੋਝਣ ਦੀ ਜਲ ਹੋਣਾ ਜਾਂ ਸਰਵ ਕਲਾ ਪ੍ਰਵੀਨ ਨਾ ਹੋਵੇ ਐਸੇ ਗੁਰਬਾਣੀ ਪੜ੍ਹਦੇ ਵੀ ਬੰਦ ਸਰਵਾਂ ਦੀ ਲੋਡ ਵੀ ਬੰਦ ਹੈ ਇਹ ਤਾਂ ਜੱਗ ਲੋੜ ਹੈ ਜਾਂ ਬਿਮਾਰ ਹੈ ਉਹ ਬਿਮਾਰ ਹੈ ਨੀ ਉਹ ਤਾਂ ਪੂਰਾ ਹੋ ਗਿਆ ਇਹ ਤਾਂ ਬਿਮਾਰ ਨੂੰ ਦੱਸਿਆ ਭਾਈ ਆ ਜੀ ਖਾਣੀਆਂ ਚੀਜ਼ ਨਹੀਂਗਾ ਨਹੀਂ ਆ ਤੇਰੀ ਸੇਵਾ ਤੇ ਵੀ ਠੀਕ ਹੈਗੀ ਇਹ ਤਾਂ ਬਿਮਾਰ ਵਾਸਤੇ ਹੈ ਜੀ ਜੇਰਾ ਬੈਦਗੁਰੂ ਗੋਬਿੰਦਾ ਇਹ ਤਾਂ ਪੈਸੇ ਨਹੀਂ ਲਿਖੇ ਵੀ ਆ ਸਾਨੂੰ ਵਿਆਹ ਕਰਨਾ ਤੂੰ ਬਿਮਾਰ ਤਾਂ ਹੋ ਗਿਆ ਦਸ ਰੂਸੀ ਆਉਂਦੇ ਜਦ ਬਿਮਾਰ ਨਹੀਂ ਹੈ ਉਹਦੇ ਵਾਸਤੇ ਸਲੇਵਰ ਨਹੀਂ ਆਏ ਖਾ ਡਾਕਟਰ ਪਹਿਲੇ ਜਾਣਦਾ ਸਰਵਕਲਾ ਪ੍ਰਵੀਨ ਕੌਣਾ ਡਾਕਟਰ ਹੈ ਉਹ ਉਹ ਡਾਕਟਰ ਸਰਵਕਲਾ ਪ੍ਰਵੀਨ ਉਹਨੇ ਤਾਂ ਡਾਕਟਰ ਤੇ ਗਰੰਟ ਦਿੱਤੀ ਉਹ ਗਰੰਟ ਤਾਂ ਕੀ ਖੋਜੇ ਬਈ ਜਿੰਨ लिखे या ਆਪਨੇ आपने ਉਹ ਨੂੰ क्यों ਦਾ ਪੜ੍ਹ ਨਹੀਂ ਲੋੜ ਐ ਕਿ खोजूगा, ਖੋਜੂਗਾ ਇਹ ਭਗਤੀ ਨੂੰ ਜੇ ਲੈ ਕੇ दस कोई भी ਕੋਈ ਵੀ ਗੁਰੂ ਗੁਰ ਬਾਣੀ ਲੈ ਕੇ ਜਿਸਿਸ ਮੈ ਉਹਨਾਂ ਹੁੰਦਾ ਉਹ ਤਾਂ ਲਿਖਦੇ ਤੇ ਫੇਰ ਕਿਤੇ ਉੱਥੋਂ ਖੋਜ ਤੇ ਦਸਪਾਛਤ ਕਿਉਂ ਗੁਰੂ ਗ੍ਰੰਥਾ ਲੈ ਕਿ ਅਸੀਂ ਆਪਣੇ ਲੈਵਲ ਤੇ ਬੰਦਿਆ ਉਹਨੂੰ ਜੈਜੇ ਅਸੀਂ ਹੋ ਜਾਈਦਾ ਸਪਾਸ਼ੀ ਇਸ ਬੇਵਕੂਫੀ ਚੋਗਾ ਹੋਇਆ ਦੇਖਿਆ ਜੈਜੇ ਅਸੀਂ ਅੱਜ ਹੋ ਸੀ ਉਹਨਾਂ ਨੇ ਅੰਦਰ ਲਿਖੇ ਨੇ ਉਹ ਖੋਜਦੇ ਫਿਰ ਉਹ ਜਮਾਤ ਲੈ ਕੇ ਅਸੀਂ ਅਤਵਾ ਬੇ ਅਰੇ ਤੁਸੀਂ ਗਰਾਂ ਦੇ ਤੁਸੀਂ ਉਹਨਾਂ ਨੇ ਲੋੜ ਪਾਣ ਦੀ ਸੀ ਜਦ ਪਾਣ ਦੀ ਲੋੜ ਹੋਊਗੀ ਪਹਿਲਾਂ ਵੱਢ ਜਾਓ ਜੇ ਸਰਵਕਲਾ ਪ੍ਰਵੀਨ ਹੈ ਜੇ ਸਰਵਕਲਾ ਪ੍ਰਵੀਨ ਹੋ ਗਏ ਉਹ ਤਾਂ ਬਾਦ ਪਾਣ ਦੀ ਲੋੜ ਨਹੀਂ ਹੁੰਦੀ ਉਹ ਦਸਮਾ ਦਾ ਪੂਰਾ ਲਿਖਤਾ ਉਹਨਾਂ ਨੇ ਜਿਹੜੂ ਉਹ ਸਾਹਿਬ ਜੀ ਆਖ ਰਹੇ ਨੇ ਅਸਰ ਦੇ ਪ੍ਰਕਾਸ਼ ਦਾ ਬਾਤ ਜੋੜ ਲਗੇ ਕਿਤੇ ਸਾਲ ਬਾਅਦ ਪ੍ਰਕਾਸ਼ ਤਾਂ ਸਿੱਖਾਂ ਨੂੰ ਦੇ ਵਾਸਤੇ ਸੀ ਭਾਈ ਤੁਸੀਂ ਬਾਣੀ پڑھ ਲੈ ਕਰੋ ਵਿਚਾਰ ਲੈ ਕਰੋ ਸਾਡੇ ਵਾਸਤੇ ਹੈ ਸਰਬਕਲਾ ਜੈ ਸਰਬਕਲਾ ਅੱਪੇ ਵਰਵੀਨ ਸਹਿ ਬੇਦਿਕ ਦੇਵ ਕਹਾਂ ਕੋ ਚੀਨ ਬਾਗ ਹੋਇਆ ਬੇਦਿਕ ਦੇਵ ਇ ਲੋੜੇ ਬੇਦਿਕ ਦੇਵ ਕੋਚਨ ਤੂ ਕਾ ਕੋ ਠੀ ਤੂ ਕੌਂ ਟਿੰਦਾ ਕਿਤੇ ਟਿੰਦਾ ਰੂ ਹਾਂ ਜਬ ਆਪਨ ਆਪ ਆਪ ਆਪਣਾ ਆਪ ਹਿਰਦੇ ਚ ਹੋਇਆ ਤਾਂ ਸਗਲ ਨੂੰ ਵਿਚਾਰ ਮਨਦਾ ਰਿਹਾ ਕੋਈ ਬਾਤ ਉਹ ਚੱਕਮਾਰਤੀ ਬਿੱਲੀ ਨੇ ਬਿੱਲੀ ਉਹਦੇ ਨਾਮ ਹੀ ਆ ਗਿਆ ਕਿ ਆਇਆ ਜਾਂ ਬਾਹਰ ਕੋਈ ਨਹੀਂ ਰਵੇ ਕੋਈ ਨਹੀਂ ਨੁਕਸਾਨ ਦਾ ਬਾਗ ਮੱਦੀ ਸਗਨ ਸਗਨ ਨਹੀਂ ਫਿਰ ਆ ਹੈ ਕਰਦੇ ਉਹ ਕਰਦੇ ਉਹ ਨਾ ਦੇ ਸਗਨ ਸਗਨ ਤੇ ਲਗਾ ਜਿਸ ਤੀਤ ਨਾ ਹੋਵੇ ਸਗਨ ਆ ਸਗਨ ਤਾਂ ਉਹ ਰੱਖ ਦੇ ਨਹੀਂ ਨੁਕਰਾ ਸਾਹੀ ਜੀ ਨੂੰ ਨੁਕਰਾ ਪਰ ਮੇਂ ਗੁਰੂ ਸਾਹਿਬ ਨੂੰ ਇਹ ਉਹਦੇ ਵਾਸਤੇ ਹੀ ਹੇ ਦਾ ਜਿਹਨਾਂ ਦਾ ਮਨ ਨਹੀਂ ਖੜਦਾ ਉਹਨਾਂ ਵਾਸਤੇ ਹੁੰਦਾ ਇਹ ਕੋਈ ਕਿਲਾ ਆਲੋਚਾ ਦਾ ਜੇ ਆਪ ਨੂੰ ਉੱਚ ਆਪ ਨੂੰ ਆਪ ਨੇੜਾ ਤਾਂ ਕੌਣ ਸਾਕਰ ਕੌਣ ਕਹੀਏ ਜੇਰਾ ਆਪ ਨੂੰ ਜਾਂ ਆਪਣਾ ਨੇੜਾ ਹੁਣ ਆਪ ਹੀ ਤਾਂ ਤੂੰ ਬ੍ਰਭ ਆਪੇ ਤੂੰ ਕੋਣ ਬ੍ਰਭ ਆਪੇ ਤੂੰ ਬਲ ਆਪੇ ਤੂੰ ਜੱਟ ਤੇਰਾ ठाਗਰ ਕੌਣ ਹੈ ਜਿਹੜਾ ਕਹਿੰਦਾ ਜੇ ਮਨ ਜਿਹੜਾ ਹੈਗਾ ਜੀਵ ਹੈ ਜਿਹੜਾ ਜੇ ਬ੍ਰਹਮ ਦਾ ਸਾਥ ਨਹੀਂ ਦਿੰਦਾ ਤੇ ਜੀਵ ਜੀਵ ਵੀ ਅਧੂਰਾ ਤੇ ਬ੍ਰਹਮ ਵੀ ਅਧੂਰਾ ਦੋਏ ਦੂਰੇ ਨੇ ਦੋਏ ਕਬ ਦੌਰ ਨੇ ਦੋਏ ਘਾਟੇ ਚ ਨੇ ਜੇ ਦੋਏ ਰਲ ਕੇ ਇੱਕ ਹੋ ਗਏ ਪੂਰੇ ਹੋ ਗਏ ਇਹਨੂੰ ਬਿਰਗਦੇਵ ਜੀ ਦੀ ਲੋੜੀ ਇਹ ਨਹੀਂ ਤੇ ਕੋਣ ਭਾਗਰ ਨੂੰ ਜੀਵ ਦੀ ਲੋੜ ਆਉਂਦੀ ਹੈ ਜੀਵ ਨੂੰ ਬ੍ਰਹਮ ਦੀ ਲੋੜ ਹੈ ਤੋਂਹ ਦੀ ਲੋੜ ਹੈ ਜੇ ਜੀਵ ਦੇ ਵਿੱਚ ਬੰਏ ਦਾ ਮੁਕਾ ਉਹ ਝੋ ਦਾ ਮੁਕਾ ਦੋਹਾਂ ਜੇ ਜਿਹੜੀ ਬੁਝੋਣ ਤਾਕਤ ਹੈ ਸ਼ਕਤੀ ਹੈ ਜੇ ਜਤ ਕੋਣ ਨਹੀਂ ਜਾਂਦੀ ਛੋੜਦਾ ਹੋਵਦੀ ਹੈ ਜਦੋਂ ਕਹਿੰਦਾ ਆਪਣੇ ਸ਼ੂਟਰ ਦਾ ਯਤਨ ਕਰੋ ਹਮ ਛੂਟੇ ਤੋਂ ਉਹ ਕਹਿੰਦਾ ਮੈਂ ਤਾਂ ਮਹਾਰਾਜੇ ਛੁੱਟ ਕੇ ਆ ਗਿਆ ਮੈਂ ਕਹਿੰਦਾ ਮੈਂ ਮਹਾਰਾਜੇ ਸੁਣ ਲੀ ਤੁ ਮਾਇਆ ਦਾ ਕੰਮ ਨਾ ਮੈਂ ਕਰ ਸਕਦਾ ਟਰ ਮੈਨੂੰ ਸਮਝਾਇਆ ਮੈਨੂੰ ਸਮਝ ਗਿਆ ਜਿੱਦ ਲੈ ਮੈਂ ਮਹਾਰਾਜੇ ਜਪਦੀ ਮੈਂ ਆ ਬੈਠਾ ਤੇ ਜਾ ਆ ਗਿਆ ਤੂੰ ਜਲ ਬਾਹਰਦਰ ਕਿਸਤੀ ਆਪਣੇ ਸ਼ੂਟਣ ਦਾ ਜਤਨ ਕਰੋ ਅਗਲਾ ਜਤਨ ਉੱਤੇ ਰਹੇ। ਤੁਮ ਛੂਟੇ ਸਤਗੁਰੂ ਰਾਜ ਤੇਰੀ ਜੇ ਰਾਵਨਾ ਬੁੱਧੀਰ ਮਿਲਤਾ ਅਗੇ ਵਗੇ। ਫਿਰ ਕਰ ਬੈਸੋ ਹਰਜਲ ਪਿਆਰੇ। ਹਰਜਲ ਪਿਆਰੇ ਸਤਗੁਰੂ ਤੁਮਰੇ ਬੋਲ। ਕਹਿੰਦਾ ਸਰਕਾਰ ਵੇਜੋ ਸਤਗੁਰ ਤੁਮ ਸਤਗੁਰ ਦਾ ਕੰਮ ਜੋ ਰਹਿ ਗਿਆ। ਸਤਗੁਰ ਤੁਮਰੇ ਗਾਲ ਸਵਾਰੇ। ਸੋ ਜੁਮਾਦ ਹਟ ਕੋਲਦਾ ਰਾਇਆ ਲੋਡ ਦੋ ਹਜ਼ੂਰੀ ਨਾਕੋ ਠਾਗਰਾ ਨਾਕੋ ਚੇਰਾ ਤੇਰਾ ਠਾਗਰਾ ਤਾਂ ਸਾਹਮਣੇ ਚ ਦੋ ਹੁੰਦੇ ਹੈ ਤਾਂ ਕੋਈ ਹੈ ਤਾਂ ਕੋਈ ਜੇ ਖੱਪੇ ਖੱਪੇ ਪਾਸੇ ਨੂੰ ਲੱਗਦਾ ਮਾਰਿਆ ਲੋਡ ਸੱਜੇ ਨੂੰ ਵੀ ਉਹਦੀ ਉੱਡੀ ਉੱਡੀ ਖੱਪਾ ਵੀ ਬੇਕਾਰ ਹੈ ਉਹਨਾਂ ਜਿਹਨਾਂ ਦਾ ਪੈਰ ਨਹੀਂ ਚੱਲਦਾ ਤੇ ਸੱਚੇ ਨਾਲ ਟਿੰਗ ਨਹੀਂ ਨਾ ਪਟੋਦੀ ਖਬੇ ਨਾ ਖਬਰ ਭਾ ਚੱਲਦਾ ਤੇ ਜੇ ਵੀ ਬੰਦ ਜੇ ਸਜੇ ਨਾ ਆਪਣੀ ਨਾਲ ਨਾ ਦੇ ਉੱਪਰ ਜਾ ਹੱਸ ਤਾ ਹੋਣਾ ਨਾ ਉਹ ਇਹ ਕਰਕੇ ਕੋਈ ਠਾਕਰ ਵੀ ਕੋਈ ਜੇਰਾ ਨਹੀਂ ਇਹ ਸਭ ਕਹਿਣ ਦੀਆਂ ਗੱਲਾਂ ਸੀ ਕਾਂ ਸੌਣ ਨੂੰ ਕੋਈ ਚਾਹ ਪਾ ਸੀਕ ਸਭ ਫਰਜ਼ ਕੀਤਾ ਸੀ ਉਹ ਫਰਜ਼ ਕੀਤਾ ਵੀ ਫਰਜ਼ ਨੂੰ ਐਕਸ ਬਰਾਬਰ ਐਨੇ ਉਹ ਤਾਂ ਐਕਸ ਬਰਾਬਰ ਨੇ ਫਰਜ਼ ਕੀਤਾ ਹੈ ਅਸੀਂ ਸਾਡਾ ਪ੍ਰੋਬਲਮ ਹੱਲ ਕਰਨ ਵਾਸਤੇ ਕੁਝ ਪ੍ਰੋਬਲਮ ਸੀ ਹੱਲ ਕਰਨ ਵਾਸਤੇ ਫਰਜ਼ ਕਰ ਲਿਆ ਸਭ ਨੂੰ ਵਾਸਤੇ ਸਮਝਾਉਣ ਵਾਸਤੇ ਫਰਜ਼ ਕੀਤਾ ਹੈ ਜਿਤਮਣ ਹੋਰ ਹੈ ਕੁਝ ਨਹੀਂ ਹੈ ਇੱਕੋ ਹੀ ਆ ਕੋਈ ਮਾਨ ਹੈ ਕੋਈ ਮਾਨ ਨਹੀਂ ਉਹ ਜੇ ਰੁਕ ਸਰ ਇੱਕ ਆਦਮੀ ਹੋਈ ਬਿਮਾਰ ਖੱਬਾ ਸੱਜਾ ਦਾ ਸੀ ਜੋੜਿਆ ਹੋਇਆ ਖੱਬਾ ਬਿਯੋਦਾ ਦਾ ਸੱਜਾ ਬਿਯੋਦਾ ਆੜੜ ਨੇ ਖੱਬੇ ਤੇ ਇੱਕਦਾ ਹੀ ਆ ਖੱਬਾ ਸੱਜਾ ਆੜਦਾ ਕੋਈ ਆ ਦੌਂਦਾ ਹਾਰਡ ਕੋਈ ਅਵਰੇਜ ਕੋਈ ਹੈ ਉਹ ਤੇ ਆਪੇ ਗੁਰਦੇ ਉਹ ਬਿੰਦਾ ਕੋਈ ਹੈ ਰੋਟੀ ਕਿਥੋਂ ਜਾਂਦੀ ਹੈ ਖਾਣਾ ਕਿਥੋਂ ਜਾਂਦੀ ਹੈ ਗੁਰਦਾਇ ਖੈਰ ਦੋ ਕਿਹੜੇ ਨੇ ਇਹਦੇ ਉੱਤੇ ਦੋ ਗੜੀਆਂ ਦੀ ਖਰਾਕ ਇੱਕ ਥੋਂ ਦੇ ਜਾਂਦੀ ਹੈ ਮੂੰਹ ਇੱਕ ਆਦੋਂ ਹੁੰਦਾ ਜੇ ਤੋ ਖਾਂਦਾ ਸਾਹ ਇੱਕ ਥੋਂ ਦੇ ਆਉਂਦਾ ਦੋਲ ਦੋ ਹੈ ਕਿਹੜੇ ਸਾਹ ਹਲੋ ਸਰੀਰ ਕਾਦੋਂ ਹੁੰਦਾ ਇਹ ਤਾਂ ਮੈਂ ਬਸ ਸੁਖਿਆਉਣ ਵਾਸਤੇ ਕੀਤਾ ਹੈ ਖਰਾਕ ਭਾਸ਼ਾ ਐਸੀ ਹੈ ਸਾਡੇ ਕੋਲ ਇਹ ਸਮਝਾਉਣ ਬੋਲਣ ਵਾਸਤੇ ਨਹੀਂ ਤਾਂ ਬੋਲ ਨਹੀਂ ਸਕਦੇ ਸਮਝਾਇਆ ਨਹੀਂ ਸਕਦੇ ਕਿ ਕੰਨ ਤੋਂ ਕੋਈ ਦੂਜਾ ਦੂਜਾ ਹੁੰਦਾ ਨਹੀਂ ਹਾਂ ਬੇਸਮਰ ਬੇਸਮਰ ਰਹੇ ਬਿਸਮਾਰ ਨਾਨਕ ਆਪਣੀ ਗੱਤ ਜਾਨੋ ਆ ਬਿਸਮਨ ਬਿਸਮਰ ਰਹੇ ਬਿਸਮਾਰ ਜਦੋਂ ਬਿਸਮਾਰ ਪੈਦਾ ਹੁੰਦਾ ਨਾ ਔੜੀ ਔੜੀ ਹੁੰਦਾ ਜਦੋਂ ਕੋਈ ਜ ਫੈਸਲਾ ਨਾ ਔੜੀ ਔੜੀ ਫੈਸਲਾ ਪਾਜਾ ਫੈਸਲਾ ਜਦ ਦੇਖ ਪੈਂਦਾ ਜਦੋਂ ਪਤਾ ਲੱਗਦਾ ਕਦਾ ਦਵੇ ਸ਼ੱਕਦਾ ਸੀ ਕਿ ਡਿਗਾ ਇਹ ਡਿਗੇ ਤਾਂ ਪੈਰ ਰੱਖਣ ਲੱਗੇ ਜਦ ਦੇ ਸ਼ੱਕ ਪੈ ਤਾਂ ਪਹਿਲੇ ਹੀ ਹੋੜ ਲੱਗ ਜਾਂਦਾ ਸਿਫਟ ਪਹਿਲਾਂ ਹੀ ਆ ਜਾਂਦੇ ਜੀ ਫਿਰ ਸਪਨ ਆਏਗਾ ਬਸਮਾਨ ਉਹ ਦਸਮਾਦ ਹੁੰਦਾ ਆਂਦਾ ਰਲਾਉਂ ਦਸਮਾਦ ਹੋ ਗਿਆ ਬਸਮਾਨ ਬਸਮਾਨ ਫਾਇਰ ਬਸਮਾਨ ਬਸਮਾਨ ਪਹਿਲੇ ਆਉਗਾ ਕਿ ਇਹ ਕੀ ਹੈਗਾ ਹਾਂ ਤਾਂ ਕੁਝ ਹੋਰੇ ਨਹੀਂ ਨਾ ਇਹ ਤਾਂ ਹੁਦਾਰੀਆਂ ਦਾ ਹੈ ਕੁਝ ਪੜਾ ਬੜਾ ਪਾਣਾ ਵਰਤੂਗਾ ਛੋਟੇ ਛੋਟੇ ਜਿਹੇ ਪਾਣੇ ਹੁੰਦੇ ਨੇ ਵਰਸਦੇ ਬਿਸਮਰਤੀ ਹੋਏ ਬਿਸਮਰ ਬਿਸਮਰ ਰਹੇ ਬਿਸਮਾਰ ਭਾਂਤ ਦੇ ਵਿੱਚ ਜਦੋਂ ਥੋੜਾ ਜਿਹਾ ਕੋਈ ਕੌਤਕ ਦੇਖਿਆ ਖੇਡ ਦੇਖੀ ਅਸਲ ਦੇ ਵਿੱਚ ਬਿਸਮਾਰਤ ਕਰਦੂਗਾ ਹੁਣ ਤਾਂ ਬੁੱਝਣ ਤੇ ਪਹਿਲੀ ਗੱਲ ਰਗ ਲੱਗਤਾਂ ਲੱਗਤਾਂ ਲਾਗਤ ਹੈ ਜੇ ਥੋੜਾ ਜਿਹਾ ਵੀ ਰਗ ਲੱਗਦਾ ਜੋ ਜਾਨਾ ਸੁਭਾਅ ਬਦਲਦਾ ਆਪਣੀ ਉਧਰ ਚੇਂਜ ਆਉਂਦੀ ਹੈ ਉਹ ਬਿਸਕੁਟ ਵਾਲੀ ਗੱਲ ਆ ਆਟੋ ਵਜਾ ਪਰ ਉਹ ਲੱਗ ਜਾਂਦਾ ਤੇ ਗੁਰਬਾਣੀ ਤੇ ਜੋ ਲਿਖਿਆ ਹੋਇਆ ਸੱਚ ਹੋਣ ਲੱਗਦਾ ਜੈਸਾ ਸਤਗੁਰੂ ਸੁਣੀਦਾ ਜਦ ਉਹ ਜੇ ਲਖਣ ਦਿਖਣ ਲੱਗ ਜਾਂਦੇ ਨੇ ਫਿਰ ਬਿਸਮਰਤ ਲੋਕ ਬਿਸਮਨ ਰਹੇ ਬਿਸਮਰਤ ਜਿਸਮਨ ਹੈ ਜਾਂ ਜਦੋਂ ਦਾ ਦਿਲ ਕਦਾ ਬਾ ਦਿਲ ਕਹੇ ਗਿਆ ਫਿਰ ਸਾਰਾ ਢਹਿ ਡੇਰੀ ਹੋ ਗਿਆ। ਜਿਸਮਾਤ ਦੇ ਵਿੱਚ ਆ ਕੇ ਬੁਲਬੁਲਦਾ 100% ਦੀ ਪਹਿਲ ਨਹੀਂ ਮੁੱਟੋ। ਸੁਣਦਾ ਜਾਂ ਜਦੋਂ ਹੁੰਦਾ ਸ਼ਬਦ ਗੁਰੂ ਨਾਲ ਜਦ ਜਿਸਮਾਤ ਹੁੰਦਾ ਪਰ ਉਸ ਤੋਂ ਪਹਿਲਾਂ ਜਦੋਂ ਬਾਦਲ ਬਰਖਾ ਜਦੋਂ ਬਿੰਦ ਬਾਦਲ ਬਰਖਾ ਆਉਣ ਲੱਗਦੀ ਹੈ ਬਿਸਮੱਲਾ ਜੇ ਤਤ ਵਿਚਾਰੇ ਜਦੋਂ ਆਪਣੇ ਆਪ ਗੱਲ ਸਮਝਣ ਆਉਣ ਲੱਗਦੀ ਹੈ ਨਾ ਅੰਦਰੋਂ బుద్ధి ਆਪ ਅੰਦਰੋਂ ਸਮਝਣ ਆਉਣ ਲੱਗਦੀ ਹੈ ਜਾਂ ਬਿਸਮੱਲਾ ਜੋ ਕੰਨਾ ਵੀ ਜਦ ਧਲ ਕਰਨਾ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈ ਉਹ ਬਿਸਮੱਲੇ ਉਹ ਪ੍ਰੋਫੈਟ ਹੈ ਵੀ ਗੱਲ ਦਾ ਜੀਚਾ ਹੈ ਇਹ ਫੇਜੂ ਆਇਆ ਹੋਣਾ ਕਿ ਲਗਾਓ ਉਹ ਜੀ ਉਹ ਕਿ ਮੈਂ ਜਾ ਜੋ ਜਿਹੜੇ ਯੋਗ ਗਏ ਦੀ ਕਥਾ ਅਸਾਂ ਅਸਿਕਤੇ ਗਏ ਦੀ ਮੈਂ ਤਾਂ ਸੋ ਕੱਲ ਦੀ ਗੱਲ ਹੈ ਮੈਂ ਕੋਈ ਐਸੀ ਗੱਲ ਹੈ ਨਹੀਂ ਇਹ ਤਾਂ ਵਾਕਿਆ ਕੋਈ ਗੱਲ ਜ਼ਰੂਰ ਹੈ ਬੁੱਝਾ ਹੋਏ ਤਾਂ ਹੋੜੇ ਹੋੜੇ ਪੂਰੀ ਟੁੱਟੀ ਫੁੱਲ ਗਈ ਸਮਾਲੇ ਆ ਉਹ ਪਾਣੀ ਜਾਂਦੇ ਵਧਾ ਗਿਆ ਟੁੱਟੀ ਫੁੱਢੀ ਗਈ ਵਧਾ ਗਿਆ ਬੰਦਾ ਗਿਆ ਇਹ ਗੈਸ ਆਉਂਦੀ ਰਹੀ। ਜੇ ਪੂਰੀ ਥਨਾ ਛਾਲਾ ਗਈ। ਬੋਰ ਕਰਦੇ ਉਹਨੇ ਆਪਾਂ। ਇਹ ਤਾਂ ਬਿਸਮਰ ਹੋਣਾ ਹੀ ਸੀ। ਬਿਸਮਰ ਬਿਸਮਰ ਰਹੇ ਬਿਸਮਰ ਰਹੇ ਬਿਸਮਰ ਨਾਨਕ ਆਪਣੀ ਗੱਤ ਜਾਨੋ ਆਪ। ਬੱਧੇ ਤਾਂ ਆਪਣੀ ਗੱਲਾਂ ਵੇਖੀ ਬਿਆਨ ਕਰਦਾ ਇਹ ਅਵਸਥਾ ਸਾਂਪੇ ਤੇ ਬੈਠੇ। ਸੇਧਾ ਜਿਹਨੂੰ ਬਸਮਾਦ ਹੋਇਆ ਉਹ ਉਸੇ ਨੂੰ ਪਤਾ ਹੈ। ਉਹ ਉਹਦਾ ਬਿਆਨ ਨਹੀਂ ਹੋਤਾ ਉਹ ਆਪਣੀ ਗੱਲ ਜਾਨੂੰ ਮਾਰ। ਜਿਹੜਾ ਬਸਮਾਦ ਹੋ ਗਿਆ ਉਹ ਬਿਆਨ ਤੇ ਕਰੇ। ਹਾਂ ਕੁਝ ਉਹ ਜਿਸਾਨੇ ਕੰਮ। ਜੈ ਸੰਨ ਅਸ਼ੇਦ ਤੁਹਾ ਕਿਸੇ ਵਿਅਕਤੀ ਆਦਾਲੀ ਗੱਲ ਬਿਆਨ ਤੇ ਪਰੇ ਐ ਤੇ ਛੱਡ ਕੇ ਨਾਨਕ ਆਪਣੀ ਗੱਤ ਚਾਲੂ ਆ। ਫਾਦੋ ਜੀ ਨੂੰ ਵਿਸਵਾਦ ਹੋਇਆ ਤਾਂ ਉਹੀ ਚੱਲਦੀ। ਇਹ ਤਾਂ ਗੁੰਗਰੇ ਦਾ ਕੋਲ ਖਾਰਿਆ। ਉੱਥੇ ਦੇਖਾ ਕੇ ਇਹ ਤਾਂ ਗੁੰਗਰੇ ਦਾ ਕੋਲ ਐ।